ਸੋ ਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਾਣਨ ਹਾਰ ਜਾਕੈ ਸਿਮਰਨ ਉਧਰੀਏ ਨਾਨਕ ਪ੍ਰਭ ਸਾਰਾ ਜੜਾ ਸਾਰੀਆਂ ਕਲਾਵਾਂ ਵਿੱਚ ਪੂਰ ਸਾਰੀਆਂ ਉਹਦੇ ਵਿੱਚ ਜਿਤੀਆਂ ਕਲਾਵਾਂ ਨੇ ਜਿੰਨਾ ਗਿਆਨ ਹੈ ਜਿੰਨੀਆਂ ਕਲਾਵਾਂ ਨੇ ਸੰਸਾਰ ਵਿੱਚ ਸਾਰੇ ਗੋਮੋਦ ਸਾਰੇ ਉੱਤੇ ਕੋਰੋਨਾ ਹੀ ਪੈਦਾ ਕੀਤਾ ਜੋ ਜਿਗਲਾਵਾ ਹੈ ਤਾਂ ਇਹ ਹੰਸਾਰ ਪੈਦਾ ਕੀਤਾ ਜੀ ਜਿਵੇਂ ਜਿਹੜੀ ਕਲਾ ਚਾਹੀਦੀ ਉਹ ਸਮਝੂਗੀ ਦੋ ਮਤ ਦੇਦੀਏ ਫਿਰ ਥਾ ਜਾਤਨ ਹਾ ਫਿਰ ਦੂਜੀ ਗੱਲੇ ਉਹ ਫਿਰ ਸਮਝਾਂਦਾ ਸਾਰਿਆਂ ਨੂੰ ਬਣਾ ਬੋਲਦਾ ਜੀ ਕਿ ਨਾ ਜੀ ਜਿਹੜੀ ਜਿਹੜੀ ਚਾਹੀਦੀ ਉਹ ਦੇ ਦਿਆ ਪਰ ਬਦੇ ਬਸ ਕਲਾਜ ਜਿਹੜੀ ਕਿ ਸੰਭਿਅ ਹੈ ਤੇ ਉਹ ਜੀ ਜਾਕੇ ਸਰ ਨੂੰ ਉਹ ਇਹ ਨਾਨਕ ਕਿਸ ਬਣਿਆ ਸਰਬ ਕਲਾ ਭਰਪੂਰ ਪ੍ਰਭ ਵਿਸਥਾ ਜਨੁ ਦਾ ਸਾਥ ਸੌਦੀ ਅੰਦਰ ਦੀ ਜਿਹੜੀ ਉਹ ਨਾਮ ਹੈ ਉਹਦੀ ਹਸਤਾ ਕਹਿ ਰਹੀ ਹੈ ਉਹ ਕਹਿ ਰਹੀ ਜੀ ਇਹਦਾ ਪ੍ਰਾਦਾ ਸਾਦਾ ਹੈ ਸਰਬ ਕਲਾ ਭਰਪੂਰ ਹੈ ਸਾਡੇ ਅੰਦਰ ਵੀ ਵਿਸਥਾ ਵੀ ਜਾਂਦਾ ਹੈ ਅਸੀਂ ਕੀ ਚਾਹੁੰਦੇ ਹੈ ਵੀ ਜਾਂਦਾ ਆਪਣੇ ਬੰਦੀ ਗੱਲ ਕੌਣ ਲੀ ਜਾਂਦਾ ਹਾਂ ਗੱਲ ਇੱਥੇ ਕਰਨੀ ਹੈ ਵੀ ਪਰਥਵੀ ਜਾਂਦਾ ਸਾਡੀ ਸਾਰੀਆਂ ਕਲਾਵਾਂ ਦੀ ਵਰਤੋਂ ਹੈ ਸਾਡੀ ਅਵਸਥਾ ਉਤਰੀਏ ਸਾਡਾ ਆਦੇਸ਼ ਮਨ ਕਰੂ ਤਾਂ ਜਿਹਾ ਕੈਸੇ ਉਤਰੀਏ 4 ਦਿਨ ਤੱਕ ਉਤਰੀਏ ਅਸੀਂ ਸਿਮਣੇ ਕਰ ਰਹੇ ਹਾਂ ਅਜੀਦਾ ਬੰਧਕਿਆ ਹੁਣਾ ਸੀ ਮੈਂ ਮਾਨਸਰ ਤੋਂ ਜਾਲਿਆ ਸੀ ਤਾਂ ਬੈਠੇ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਬੈਠਣੇ ਕਿ ਹਰਾ ਕੇ ਫਿਰ ਉਹ ਕਹਿੰਦਾ ਸਰਕਾਰ ਦਾ ਗੱਲ ਕਹਿ ਰਹੀ ਆ ਵੀ ਇਹਨੂੰ ਬਿਰਸਾ ਪਤਾ ਹੀ ਆ ਵੀ ਆ ਕੇ ਕਿਉਂ ਬੈਠੇ ਭਾਈ ਭੁੱਖੇ ਨੇ ਆ ਕੇ ਬੈਠੇ ਨੇ ਸਾਧਨ ਨੂੰ ਵੀ ਪਤਾ ਹੀ ਆ ਭਾਈ ਹੁਣ ਰੋਟੀਆਂ ਆਇਆ ਪਾਣੀ ਪਤਾ ਹੀ ਹੋਰੋਂ ਵੀ ਆਇਆ ਨੇ ਮੈਂ ਪਰ ਤਾਂ ਜਾਣ ਹਰ ਜਾ ਕੇ ਸ੍ਰਮਣ ਹੋ ਤਰੀਏ ਸ੍ਰਮਣ ਇਹ ਕਰੂਗਾ ਜਬ ਮ ਮੁੱਤੇ ਨਾ ਗੱਲਾਂ ਦੀ ਕਰ ਕੀ ਕਰਨਾ ਆਪਾਂ ਚੇਤਾ ਕਰ ਕੀ ਕਰਨਾ ਪੁਰਾਣੇ ਤੋਂ ਆਇਓ ਜ਼ਹਰਾ ਕੋ ਆਇਆ ਸੀ ਲਾਜ਼ਰ ਇੱਥੇ ਆ ਕੇ ਬੰਨ ਫਸਾ ਲਿਆ ਹੋਏ ਪਾਸੇ ਉਦਾਈ ਮਾਰਾਂ ਜੋ ਬਦਲਾ ਲਿਆ ਇੱਥੇ ਤਨ ਬੜਾ ਆ ਤਨ ਬੜਾ ਜੀਤ ਹੈ ਜੀ ਹੈ ਉਹ ਮਨ ਨਹੀਂ ਆ ਜ਼ਮਾਨਾ ਤੇ ਜੀ ਦਾ ਹੀ ਫਰਕ ਹੈ ਜੀ ਅੱਲਾ ਹੁੰਦਾ ਮਨਵਾ ਅੱਲਾ ਹੁੰਦਾ ਉਲਟੀ ਕਰਦਾ ਜੀ ਹੈ ਲੱਭਾਉਂ ਤੈਕੇ ਖਾਲਾ ਤਮਾਨ ਜੀਆ ਸਭ ਸਭ ਜੀਤੀ ਜੀ ਹੈ ਹੱਡੀ ਖਰਾਸੋ ਉਹ ਜੀ ਨੇ ਉੱਡੀ ਕੀਤੀ ਹੈ ਪਰ ਉਹਨੇ ਖਰੀਦ ਮੰਨੇ ਦਾ ਖਾਲੀ ਉਹਨੇ ਦੇਖ ਲਿਆ ਵਧੀਆ ਸੱਚੀ ਸੀ ਉਹਨੇ ਤਾਂ ਖਾਲੀ ਸੀ ਜੀ ਨੇ ਦੇਖਿਆ ਵੀ ਉਹਨੇ ਉੱਡੀ ਜੀ ਖਾਲੀ ਉਹ ਕੱਢ ਕੇ ਬਾਹਰ ਮਾਰਦਾ